धोरा चंद्रपगा सरता निकट रांजन नामा जाट जो अवला निरखत स जाय सदन पर खाट चौपाई मोहत तेह त्रिय नयन निहारे जन सावक सायक के मारे चितमय अधिकरीज के रहै रांजन रांजन, रांजन मुख ते कहै का कर्म काल तहै सो कयो तौ देश काल पर गयो जियत ना को नर बच्यो नगर में सो जाके धान घर में ਚਿਤਰਦੇਵੇ ਘਰਾਂ ਨੀ ਨਗਰ ਮੈਂ ਰਾਜਾ ਏ ਕੂਤੇ ਘਰ ਮੈਂ ਤਾਕੇ ਹੋਰ ਬਚੋ ਕੋਈ ਮਾਇ ਪੂਤ ਵੈ ਬਾਚੇ ਦੋਈ ਰਨਿਆ ਭੂਖ ਅਤਕ ਜਬ ਜਾਗੀ ਤਾਕੋ ਕੋ ਬੇਚ ਮੇਖਲਾ ਸਾਜੀ ਨਿਤ ਪੀਸਨ ਪਰ ਦਵਾਰੇ ਜਾਵੈ ਜੂਠ ਚੌਕਾ ਚਮਖਾਵੈ ਐਸੇ ਹੀ ਭੂਖਨ ਮਰ ਗਈ ਪਉਣ ਬਿਦ ਅਤ ਦਈ ਸੂਕੇ ਪੈ ਹਰੇ ਜਨ ਸਾਰੇ ਬਹੁਰ ਕੇ ਵੱਜੇ ਨਗਾਰੇ ਤਾਂਹੇ ਏਕ ਰਾਂਝਾ ਈ ਉਬਰਿਓ ਔਰ ਲੋਗ ਸਭ ਤਾਹ ਕੋ ਮਰਿਓ ਰਾਂਝੋ ਜਾਟ ਏਤ ਦਿਨ ਪਾਰਿਓ ਪੂਤ ਭਾਵਤੇ ਤਾਹ ਜੀ ਆਰਿਓ ਪੂਤ ਜਾਟ ਕੋ ਸਭ ਕੋ ਜਾਣੈ ਤਿੰਨ ਤੇ ਕੋ ਨਾ ਰਹੋ ਪਛਾਨੈ ਐਸੇ ਕਾਲ ਬੀਤ ਕਹਿ ਗਇਓ ਕਾ ਮੈਂ ਬਦਨ ਤਮਾ ਮੂੰ ਦਇਓ ਮੈਂ ਖੀਚਾਰ ਲਿਤ ਗਰਿ ਆਵੈ ਰਾਂਝਾ ਆਪਣੂ ਨਾਮ ਸਦਾਵੈ ਪੂਤ ਜਾਟ ਕੋ ਤੇ ਸਭ ਜਾਣੈ ਰਾਜਪੂਤ ਕੈ ਕੋ ਪਹਿਚਾਨੈ ਇਤੀ ਬਾਤ ਰਾਂਝਾ ਕੀ ਕਹੀ ਆਪ ਚਲ ਬਾਤ ਹੀਰ ਪੈ ਰਹੀ ਤੂੰ ਕਹ ਤਾ ਕੀ ਕਥਾ ਸੁਣਾਉ ਤਾ ਤੇ ਤੁਮਰੋ ਹਿਰਦੈ ਸਿਰਾਉ ਅੜਿਲ ਇੰਦਰ ਰਾਏ ਕੇ ਨਗਰ ਆਪ ਅਸਰਾ ਇੱਕ ਰਹਿ ਮੈਂ ਕਲਾ ਤੇ ਨਾਮ ਸਕਲ ਜਗ ਜੋਕ ਹੈ ਤਾਕੋ ਰੂਪ ਨਰੇਸ਼ ਜੋ ਕੋ ਨਿਹਾਰ ਹੀ ਹੋ ਗਿਰੈ ਧਰਨ ਪਰ ਝੂਮ ਮੈਂਨ ਸਰਮਾਰੀ ਚਉ ਪਈ ਮੋਨਾ ਸਭਾ ਕਪਲ ਮੁਨੇ ਆਇਓ ਔਰ ਜਹ ਮੈਨ ਕਾ ਪਾਇਓ ਤੇ ਲਖ ਮਨ ਬੀਰਜ ਮੈ ਸਰਾਪਤ ਤਿਹ ਤੁਮ ਗਿਰ ਮਿਰਤ ਲੋਕ ਮੈ ਪਰੋ ਜੂਨ ਸਿਆਲ ਜਾਟ ਕੀ ਧਰੋ ਹੀਰ ਆਪਨੋ ਨਾਮ ਸਦਾਵ ਝੂਠ ਕੂਟ ਤੁਰਕਣ ਕੀ ਖਾਵ ਦੋਰਾ ਤਬ ਅਵਲਾ ਕੰਪਤ ਪਈ ਤਾ ਕੇ ਪਰ ਕੈ ਪਾਏ ਕਿਉ ਹੋਏ ਉਧਾਰ ਮਮ ਸੋਦਜ ਕਹੋ ਪਾਏ ਚੌਬੀ ਇੰਦਰ ਸੋ ਮ੍ਰਿਤ ਮੰਡਲ ਜਬ ਜੈ ਹੈ ਰਾਂਝਾ ਆਪਣੋ ਨਾਮ ਕਹੈ ਹੈ ਤੈ ਸੋ ਅਤਿਕ ਪ੍ਰੀਤ ਉਪਜਾਵੈ ਅਮਰਾਪਤੀ ਬਹੁਰ ਤੋ ਹਿਲਿ ਆਵੈ ਦੋਰਾ ਜੂਨ ਜਾਟ ਕੀ ਤਿੰਨ ਤਰੀ ਮ੍ਰਿਤ ਮੰਡਲ ਮੈਂ ਆਏ ਚੂਚਕ ਕੇ ਉਪਜੀ ਭਵਨ ਹੀਰ ਨਾਮ ਤਰਵਾਏ ਚਉਪਈ ਇਸੀ ਪਾਨਸੋ ਕਾਲ ਬਿਹਾਨਿਓ ਬੀਤਿਓ ਵਰਖੇਕ ਦਿਨ ਜਾਨਿਓ ਵਾਲਾ ਆਪਣੋ ਛੂੜ ਜਬ ਗਇਓ ਜੋਬ ਨੇ ਆਣ ਦਮਾ ਮੋ रांजा चार मैखियां ने आवे ताको ਹੀਰ ਬਲ ਜਾਵੈ जावे ता सों अदक ने होव जायो भात भांसो मुख बढायो धोरा खात पीत बैठत उठत सोवत जागत नित कबूना बिसरा चित ते सुंदर दर्शन मित हीर बाज सवैया बाहर जाओ तो बारी गृह आवत आवत संग लगे ही जौ हट बैठ रहो घर में पीए पैठ रहै ही मैं पहले ही ਨੀਂਦ ਹਮੈ ਮਕਵਾਨੀ ਕਰੀ ਛਿਨਹੀ ਨ ਆਰਾਮ ਸਕੀ ਸੁਬਨੇਹੀ ਜਾਗਤ ਸੋਵਤ ਰਾਤ ਦੇ ਉਸ ਕਹੂ ਵੇ ਰਾਜਨ ਚੈਨ ਨਾ ਦੇਹੀ ਚਉ ਪਈ ਰਾਜਨ ਰਾਜਨ ਸਦਾ ਉਚਾਰੈ ਸੋਤ ਜਾਗਤ ਤਾਏ ਸੰਭਾਰੈ ਬੈਠਤ ਉਠਤ ਚਲਤ ਹੂੰ ਸੰਗਾ ਤਾਹੀ ਕਉ ਜਾਣੈ ਕੈ ਅੰਗਾ ਕਾਹੂ ਕੋ ਜੋਹੀਰ ਨਿਹਾਰੈ ਰਾਜਨ ਹੀ ਰਿਤ ਬੀਚ ਵਿਚਾਰੈ ਐਸੀ ਪ੍ਰੀਤ ਪ੍ਰਿਆਕੇ ਲਾਗੀ ਨੀਂਦ ਭੂਗਤਾ ਕੇ ਸਭ ਭਾਗੀ रांजनी के रूप वाह भई ज्यों मेर बूंद बार मो गई जैसे मृग म्रिक मृगिया को लहै होत बधाए बिना ही गहे दोहरा जैसे लकरी आग में परत कहूं ते आए पलक द्वैगता मैं रहै बौर आग होवै जाए हर जा आस ऐसे सुन्यों करत एक ते दोए बिरह ਰਾਜਨ ਹੀਰਪ੍ਰੀਮ ਮੇ ਰਹੇ ਏਕਿ ਹੋਏ ਕਹਿ ਬੇ ਕਉ ਤਨ ਏਕ ਹੀ ਲਹਿ ਬੇ ਕੋ ਤਨ ਦੋਏ ਚਉਪਈ ਐਸੀ ਪ੍ਰੀਤ ਪ੍ਰਿਆ ਕੀ ਪਈ ਸਿਗਰੀ ਬਿਸਰਤਾ ਹੈ ਸੁਦ ਗਈ ਰਾਜਾ ਜੂ ਕੇ ਰੂਪ ਰਜਾਨੀ ਲੋਕ ਲਾਜਤਾਜ ਪਈ دیਵਾਨੀ ਤਬ ਚੂਜ ਕੇ ਇਹ ਭਾਂਤ ਵਿਚਾਰੀ ਆ ਕੰਨਿਆ ਨਹਿ ਹਮਾਰੀ ਅਭੀ ਇਹ ਖੇਰਾ ਕੋ ਦੀਜੈ ਜਾਂ ਮੈਂ ਤਨਖ ਢੀਲ ਨਹ ਕੀਜੈ ਖੇਰਾ ਬੋਲ ਤੁਰਤ ਤਿਸ ਦਇਓ ਰਾਂਜਾ ਅਤਿੱਥ ਹੋਏ ਸੰਗ ਗਇਓ ਮਾਗਤ ਭੀਖ ਖਾਤ ਜਪਾਇਓ ਲੈ ਤਾ ਕੋ ਸੁਰ ਲੋਕ ਸਿਧਾਇਓ ਰਾਂਜਾ ਹੀਰ ਮਿਲਤ ਜਪਐ ਚਿਤ ਕੇ ਸਗਲ ਸੋਕ ਮਿਟ ਗਐ ਹਿਆ ਕੀ ਅਬਦ ਵੀਰ ਜਬ ਗਈ ਬਾੜ ਦੁਹੂੰ ਸੁਰਪੁਰ ਕੀ ਲਈ ਦੋਹਰਾ ਰਾਂਜਾ ਪਇਓ ਸ੍ਰੀ ਸਤਾ ਮੇਨ ਕਾ ਹੀਰ ਯਾ ਜਗ ਮੈਂ ਗਾਵਤ ਸਦਾ सब कवि कुल जस धीर एत श्री चरित्र पख्याने त्रिया चरित्रे भूप मंत्री संवादे 98 73 समाप्त मस्त मस्त अपजू